ਸੇ ਮਹਲਾ ਮਹੱਲਾ ਪੰਜਵਾਂ ਸਭੈ ਉਤਰਨ ਨਿਤ ਨਿਤ ਗੁਣ ਗਾਓ ਕੋਟ ਕਲੇਸ਼ਾਂ ਨਾਨਕ ਬਿਸਰੈ ਨਾਉ ਕਿਲ ਸਭੈ ਉਤਰਨ ਜੀਤ ਨਿਤ ਉਨੋ ਯਾਦਤਨ ਗੁਣ ਗਾਣਾ ਜਸ ਕਰ ਸਾਡਾ ਜਸ ਕਰਨ ਨੂੰ ਕਿਹਾ ਹੈ ਜਸ ਇੱਕ ਸ਼ਬਦ ਦੀ ਜਸ ਬੋਲ ਬੋਚ ਕਿਆ ਸੁਬਹ ਗੋਲ ਕਾਹਨ ਤਰਾ ਤਰਾ ਦੇ ਉਹਦੇ ਗੁਣ ਬੇਅੰਤ ਨੇ ਠੀਕ ਹੈ ਜੀ ਬੇਅੰਤ ਗੁਣਾ ਦਾ ਉਚਾਰਨ ਕਰਨਾ ਹੀ ਗੋਲ ਲੋਕ ਜਪਦੇ ਗੁਣ ਬਹੁਤ ਧੰਨ ਗੋਲ ਦਾ ਇੱਕ ਨੀਅਲ ਤਾਂ ਹਾਂਜੀ ਇੱਕ ਗੋਲ ਬਾਰ-ਬਾਰ ਉਹ ਜਪ ਕਰਦੇ ਬਾਰ-ਬਾਰ ਉਹ ਜਪ ਕਰਦੇ ਕੋਈ ਗੁਣ ਗਾਇਨ ਕਰਦੇ ਤੇ ਲੇਖੋ ਇਹ ਕਿਲ ਵਿੱਚ ਕਿੰਨੇ ਨਾ ਮਾਇਆ ਦੇ ਮਾਇਆ ਕਰਕੇ ਸਾਡੇ ਜਿਹੜੀ ਚੋਬਾ ਮਾਇਆ ਦੀ ਦੁੱਖ ਜਾਂਦੇ ਨੇ ਖਤਮ ਹੋ ਜਾਂਦੇ ਨੇ ਇਹ ਨਾਲ ਆਸਦੇ ਨਹੀਂ ਹੁੰਦਾ ਇਹ ਬੀਅਸਰ ਹੋ ਜਾਂਦੇ ਨੇ ਕਿਲ ਵਿੱਚ ਕੋਟ ਕਲੇਸ਼ਾ ਉਪਜੇ ਨਾਨਕ ਬਿਸਰੇ ਜੇ ਕਰੋੜਾਂ ਹੀ ਕਲੇਸ਼ ਦੇ ਆ ਦੇ ਕਰੋੜਾਂ ਆਵੇ ਆ ਉਹਨੂੰ ਹਾਂਜੀ ਕਲੇਸ਼ ਉਪਜੇ ਜੇ ਸਰ ਇਹ ਰੋ ਜੇ ਨੋ ਵਿਸਰ ਜਾਏ ਉਹ ਕਰੋੜਾਂ ਦੇ 1000 ਵੀ ਕੋਣ ਬਣਦਾ ਜੀ ਫਿਰ ਭਾਵ ਚਾਹ ਗਿਆ ਨਾ ਗਿਆਨ ਵਿਸਰ ਜਾ ਜਸੇ ਵਿਸਰ ਗਿਆ ਮਹੱਲਾ ਨਾਨਕ ਸਤਗੁਰ ਭੇਟੀ ਪੂਰੀ ਹੋਵੇ ਜੁਗਤ ਹਸੰਦੇ ਆ ਖੇਲੰਦੇ ਆ ਪੈਨੰਦੇ ਆ ਪਾਵੰਦਿਆਂ ਵਿੱਚੇ ਮੁਕਤ ਗੁਰਾਂ ਨਾਨਕ ਕਹਿੰਦਾ ਜੇ ਸਤਗੁਰ ਮਿਲ ਜੇ ਬੇਲਾ ਸਤਗੁਰ ਤੇ ਖਾਲੀ ਕੋਈ ਨਹੀਂ ਇਧਰ ਅੰਦਰ ਆਖਦੇ ਮਿਲ ਜੇ ਪੂਰੀ ਹੋਵੇ ਜੁਗਤ ਬਸ ਜਿਹੜੀ ਜੁਗਤੀ ਹੈ ਨਾ ਜੁਗਤੀ ਪੂਰੀ ਹੋਣੀ ਇਹ ਜੁਗਤੀ ਸੀ ਕਿ ਜੇ ਸਤਿਗੁਰੂ ਕੋਲ ਬੈਠਣਾ ਸੀ ਆਹ ਚੁਪਤੀ ਪੂਰੀ ਹੋ ਗਈ ਆ ਪੂਰਾ ਹੋ ਰਿਹਾ ਫਸੰਦੇ ਆ ਖਿਲੰਦੇ ਆ ਪੈਦੰਦੇ ਆ ਖਾਵੰਦੇ ਆ ਵਿਚੇ ਹੋਵੇ ਮੁਕਤ ਘਰ ਵਿੱਚ ਰਹਿੰਦੇ ਆ ਹੀ ਮੁਕਤ ਆ ਉਹ ਜਿਉਂ ਦਾ ਹੀ ਮੁਕਤ ਪਤਾ ਲੱਗਦਾ ਕਿ ਖਾਣਾ ਪੀਣਾ ਰਹਿਣਾ ਉਵੇਂ ਹੱਸਾ ਖੇਡਦਾ ਰਹਿਣਾ ਠੀਕ ਹੈ ਪਰ ਅੰਦਰੋਂ ਅੰਦਰ ਉਹ ਆਪਣੇ ਜਿਹੜਾ ਪਿਛਲਾ ਸ਼ਲੋਕ ਨੇ ਰਾਤ ਰਾਹ ਕਰ ਜੋੜੀਏ ਇੱਥੇ ਫਿਰ ਖੰਡਨ ਹੋ ਜਾਂਦਾ ਜੇ ਆਪਾਂ ਹੱਥ ਜੋੜ ਕੇ ਖੜੇ ਰਹੀਏ ਕਿਵੇਂ ਹੱਸਾਂਗੇ ਕਿਵੇਂ ਖੇਲਾਂਗੇ ਕਿਵੇਂ ਪਾਵਾਂਗੇ ਕਿਵੇਂ ਖਾਵਾਂਗੇ ਬਿਲਕੁਲ ਠੀਕ ਹੈ ਕਿਹਾ ਹੋਇਆ ਖੋਦਣੀ ਦੀ ਐਡੀ ਮੂਰਤੀ ਲੈ ਲਈ ਥੱਲੇ ਅਸਾਨੂੰ ਖੋਦਿਆ ਹੀ ਦੀ ਸਾੱਤ ਗਾਜੀ ਜੀ ਰਜਾਈਆ ਸਾੱਤ ਗਾਜੀ ਰੂਮ ਥੱਲੇ ਨੇ ਕਾਹੇ ਹੋ ਬਾਣੀ ਸੁਣਦੀ ਉਹ ਨੂੰ ਆਇਲਾ ਸਰੀਰ ਹੈ ਸਤ ਤਾਤਾਂ ਨਾਲ ਸੱਤ ਦਾ ਜਰੂਰ ਹੈ ਜਿ ਇਹਦੇ ਵਿੱਚ ਕਿੱਥੇ ਸੁਣਦੀ ਹੈ ਅਸ਼ਟਾਤ ਕੀ ਕਾਇਆ ਸੱਤ ਇਲਾਕੇ ਗਿਆ ਨਾ ਕਰਨਾ ਠੀਕ ਹੈ ਜੀ ਹਸਣਦੇ ਆ ਖੇਲਣਦੇ ਆ ਪੈਨਣਦੇ ਆ ਖਾਵੰਦਿਆਂ ਵਿੱਚ ਹੋਵੇ ਮੁਕਤ ਵਿੱਚ ਹੋਵੇ ਮੁਕਤ ਉਹ ਵਰਦੇ ਨਹੀਂ ਰੱਖਣ ਦੀ ਲੋੜ ਫਿਰ ਵਰਤ ਦਾ ਕਦਰ ਦੇ ਪੌੜੀ ਸੋ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤਗੁਰ ਵਾਹ ਵਾਹ ਜਿਨ ਹਰਸਿਓ ਜੋੜਿਆ ਸੋ ਸਤਗੁਰ ਧੰਨ ਧੰਨ ਕਿਨ ਭਰਮ ਗੜ ਤੋੜਿਆ ਉਹ ਧੰਨ ਧੰਨ ਸਤਗੁਰ ਦੇ ਇਥੇ ਸੱਚ ਦਾ ਗਿਆਨ ਸੱਚ ਦਾ ਗਿਆਨ ਤੇ ਚੇਤਨਾ ਦੀ ਗੱਲ ਨਹੀਂ ਜੇ ਜੇਕਰ ਆਦਮੀ ਦੀ ਗੱਲ ਵੀ ਆ ਤਾਂ ਗਿਆਨ ਨਹੀਂ ਤੋੜਿਆ ਉਹਦੇ ਨੇ ਹਾਂਜੀ ਆਪਦਾ ਵੀ ਤੋੜ ਸਕਦਾ ਉਹ ਉਹਦੇ ਉਪਦੇਸ਼ ਗੀਤਾ ਉਪਦੇਸ਼ ਨਹੀਂ ਤੋੜ ਦਿੱਤਾ ਉਹ ਸਤਗੁਰ ਤੁੱਤ ਸੋ ਸਤਗੁਰ ਵਾਹ ਵਾਹ ਜਿਹਨਾਂ ਹਰਥਿਉ ਜੋੜਿਆ ਤੇ ਕੁਰਬਾਨ ਜਾਂਦੇ ਤਲੇ ਹਾਰ ਜਾਂਦੇ ਜਿਨ ਹਰਥੂ ਜੋੜਿਆ ਜਿਹਨੇ ਆਪਣੇ ਬੂਲ ਨਾਲ ਜੋੜਤਾ ਤੇ ਆਪਣੇ ਬੂਲ ਹੈ ਨਾਮ ਨਿਦਾਨ ਅਖੁੱਟ ਗੁਰਦੇਈ दारुਓ ਮਹਾਂ ਰੋਗ ਬਿਕਰਾਲ ਤਿਨੇ ਬਿਦਾਰੂਓ ਲੋਭ ਨਾਲ ਆਖੁੱਟ ਗੁਰਦੇਈ दारुਓ ਧਾਵਨ ਨਾਲ ਆਖੁੱਟ ਕਹਿੰਦੇ ਜਿਹਦੀ ਐਸ ਵਾਈ ਦੀ ਐਜੀ ਦਵਾਈ ਆ ਐਸਪਾਇਰੀ ਉਦਿਓ ਨਹੀਂ। ਖੋਟਾ ਗੁਰਬੇਈ दारू ਉਹ ਐਜੀ ਦਾਲੂ ਦਿੱਤੀਆ ਖੋਟਾ ਇਹਦੀ ਐਸਪਾਇਰੀ ਉਦਿ। ਕਿਆ ਲੱਖ ਸਾਲ ਬਾਅਦ ਕਿਸੇ ਨੂੰ ਦੇ ਦੇਉ ਇਹ ਜਾਈਏ। ਅਮਾਰਾ ਸਾਰੇ ਸਾਰਿਆਂ ਦਾ ਸਾਰੇ ਦੂਰ ਕਰਦੇ। ਸਾਰਾ ਤੋਂ ਖੜਾ ਛੜਾਉਂਦਾ। ਪਾਇਆ ਨਾਮ ਨਿਧਾਨ ਬਹੁਤ ਖਜ਼ਾਨੇ ਆ ਜਿੱਤਾ ਜਨਮ ਅਪਾਰ ਆਪ ਪਛਾਨੀ ਪਾਇਆ ਨਾਮ ਨਾਲ ਬਾਦ ਬਹੁਤ ਖਜ਼ਾਨੇ ਦੁਬਜ਼ਾ ਖਨਾਖ ਵਾਲਿਆ ਬਹੁਤ ਵੱਡੇ ਵੱਡੇ ਖਜ਼ਾਨੇ ਪਾਲੇ ਕਿੰਨੇ ਖਜ਼ਾਨੇ ਕੋਈ ਗਿਣਤੀ ਹੋਈ ਨਹੀਂ ਖਜ਼ਾਨੇ ਜੀ ਖਜ਼ਾਨੇ ਨੇ ਲੋਕਾਂ ਜਨਮ ਅਪਾਰ ਆਪ ਪਛਾਨਦੇ ਕਿੰਨੂ ਅਪਾਰ ਬਿਲ ਗਿਆ ਜਿੱਤਾ ਜਨਮ ਅਪਾਰ ਜਾਨੂ ਬਦਾਰ ਤੇ ਜਿੱਤ ਲਿਆ ਜਾਨੂ ਬਦਾਰ ਚੌਥਾ ਬਦਾਰ ਤੇ ਜਿੱਤ ਲਿਆ ਚੌਥਾ ਬਦਾਰ ਜਿੱਤ ਲਿਆ ਜਾਨੂ ਅਪਾਰ ਹਾਂਜੀ ਜਾਨੂ ਕਹਿਨੇ ਨੇ ਜੀ ਦੇ ਬਾਦ ਭਰਨਵੀ ਦੀ ਹੈ ਸਦਜੀਵਨ ਹੂੰ ਚੌਥਾ ਬਦਾਰ ਤੇ ਆ ਜਿੱਤਾ ਜਾਨੂ ਅਪਾਰ ਆਪ ਪਛਾਣ ਲਿਆ ਆਪ ਜੇ ਲਿਆ ਇਹ ਜਾਨੂ ਅਪਾਰ ਪਾਇਆ ਇਹ ਜਿੱਤਿਆ ਆਪਣਾ ਪਛਾਣਿਆ ਕਿਤੇ ਗੁਰੂ ਦਾ ਬਲਾਅਬ ਕਿਤੇ ਪਰਮੇਸ਼ਰ ਦਾ ਬਲਾਅਬ ਕਿਤੇ ਪਰਮੇਸ਼ਰ ਦੇ ਵਿੱਚ ਗਨੀਤਤਾ ਦੀ ਗੱਲ ਕਿਤੇ ਗੁਰਬਾਣੀ ਸਾਡੇ ਉਹ ਤਾਂ ਫਿਰ ਹਿੰਦੂ ਦਰਸ਼ਨ ਦੇ ਨਾਲ ਕੋਲ ਸਾਨੂੰ ਅਰਥ ਮਿਲੇ ਉਹ ਤਾਂ ਹਿੰਦੂ ਆਯਾਸ ਕਰਕੇ ਦੇ ਉਹ ਕਨਸੈਪਟ ਹੀ ਹੁੰਦਾ ਨਹੀਂ ਹੈ ਜਿਹੜਾ ਵਦੂ ਬੁਰੇ ਦੇ ਬਣਾਤੇ ਹਾਂਜੀ ਮਹਿਮਾ ਕਹੀ ਨਾ ਜਾਏ ਗੁਰਸਮਰਤھ ਦੇਵ ਗੁਰ ਪਾਰਬ੍ਰह्म ਪਰਮੇਸ਼ਰ ਜਾਏ ਗੁਰ ਸੁਬਰਤھ ਦੇਵ ਸੁਬਰਤھ ਦੇਵ ਉਹਦੇ ਗਿਆਨ ਦੀ ਵੇਗੋ ਨਹੀਂ ਕਹੀ ਜਾ ਸਕਦੀ ਸੁਬਰਤ ਗੁਰਦੇਵ ਦੇ ਗੁਰਦੇਵ ਦੀ ਕਹੀ ਜਾ ਸਕਦੀ ਇਹ ਉਹ ਸੁਭਰਤ ਕਾਦੇ ਹੋ ਗਿਆ ਪਹਿਲਾਂ ਕਾਦੇ ਨਹੀਂ ਸੁਭਰਤ ਕੁਰਤਾ ਪਹਿਲਾਂ ਵੀ ਸੀ ਉਹ ਗੁਰਬਾਨੀ ਦਾ ਗਿਆਨ ਸਭ ਆ ਗਿਆ ਹੁਣ ਤਾਂ ਸੁਭਰਤ ਹੋ ਗਿਆ ਪਹਿਲਾਂ ਅਨਪੜ੍ਹ ਸੀ ਹੁਣ ਪੜ ਗਿਆ ਉਹਨੂੰ ਸਿੱਖ ਬਣ ਗਿਆ ਤੇ ਲੈ ਲਈ ਉਹ ਕੀ ਗੁਰਬਾਹ ਪਰਮਪੁਰਮੇਸ਼ਰ ਉਹ ਪਰੰਪਰ ਅੰਲਖ ਅਪੇਵ ਗੁਰ ਕੀ ਆ ਪਾਤਵਰਕ ਗੋਰੇ ਪਾਤਵਰਕ ਬਣ ਗਿਆ ਪਰਮੇਸ਼ਰ ਬਣ ਗਿਆ ਅਪਰੰਪਰ ਬਣ ਗਿਆ ਅਲਖ ਬਣ ਗਿਆ ਭੇ ਬਣ ਗਿਆ ਤੇ ਨੀਂਦ ਹੋ ਗਿਆ ਵਿਚੋ ਦੇ ਵਿਚੋ ਹੀ ਨੀਂਦ ਹੋ ਗਈ ਇਹ ਹੋ ਹੀ ਨਹੀਂ ਵਿਚੋਂ ਗੁਰੂ ਨੂੰ ਗੁਰੂ ਲੱਭਦੇ ਫਿਰਦੇ ਦੇ ਵਿੱਚੋਂ ਉਹ ਨਾਮ ਆਵਸਥਾ ਨਰਕ ਦੀ ਹੈ ਗੁਰਪਾਲ ਆਪਣਾ ਨੂੰ ਪਰਮੇਸ਼ਰ ਅਪਰੰਪਰ ਅਲੱਖ ਅਪੇਵ ਉਹ ਤੇ ਪਤਾ ਨਹੀਂ ਕਿਤੇ ਗਏ ਜੇ ਬੈਠੇ ਦੇ ਵਿਚੇ ਉਹ ਹੈ ਤੇ